श्लोक महल्ला पहला सबे राती सब देहे सब ਠਿੱਤੀ ਸਭ ਵਾਰ ਸੱਬੇ ਰੁੱਤੀ ਮਹਾ ਸਭ ਸਭ ਧਰਤੀ ਸਭ ਪਾਰ ਸਾਰਿਆਂ ਰੁੱਤਾਂ ਆਗੀਆਂ ਵਿੱਚ ਸਾਰੇ ਦਿਨ ਆ ਗਏ ਦੇਹ ਸਭ ਚਿਤਾਗੀਆਂ ਸਭ ਵਾਰ ਆ ਗਏ ਕੋਈ ਠੱਟੋਵੇ ਕੋਈ ਵਾਰ ਹੋਵੇ ਕੋਈ ਰੁੱਤ ਹੋਵੇ ਕੋਈ ਬੀਂਦਾ ਹੋਵੇ ਕੁਝ ਦਿਨ ਹੋਵੇ ਕੋਈ ਫਰਕ ਨਹੀਂ ਪੈਂਦਾ ਇਹੜਾ ਨੇ ਕਾਸ਼ਤੀ ਨੂੰ ਚੰਗਾ ਮੰਨਿਆ ਕਿਸੇ ਦਿਨਾਂ ਨੂੰ ਚੰਗਾ ਜਿਹੜਾ ਮਾੜੇ ਮੰਦੇ ਨੇ ਵਿਚਾਰ ਕਰਦੇ ਨੇ ਉਹ ਖਿਲਾਫ ਹੈ ਭੰਤੀ ਕਲੀ ਸਭੇ ਰੁੱਤੀ ਸਾਰੀ ਠੀਕ ਨੇ ਹਾਂ ਸਭ ਵੀ ਨੇ ਠੀਕ ਨੇ ਹਾਂ ਸਭ ਸਭ ਠਰਤੀ ਸਭ ਸਾਰੀਆਂ ਜੀ ਵੀਡੀਓ ਨੇ ਕੋਈ ਨਹੀਂ ਹੈ ਵੀ ਆ ਜੀ ਬਹੁਤ ਮਾੜਾ ਇਹ ਜਿਹੜੀ ਕਾਸ਼ੀ ਚੱਗੀ ਹੈ ਇਹ ਅਕਾਸ਼ੀ ਮਾੜੀ ਹੈ ਬਹੁਤ ਜਿੰਨੇ ਕੋਈ ਫਰਕ ਨਹੀਂ ਪੈਂਦਾ ਤਰਤੀਰਾ ਕੋਈ ਵੀ ਹਿੱਸਾ ਹੋਵੇ ਕੋਈ ਵੀ ਭਾਗ ਹੋਵੇ ਸਭ ਭਾਰ ਭਾਰ ਕਿਸੇ ਕਿਸਮ ਦਾ ਹੋਵੇ ਸਰ ਤਿਆਗ ਵੀ ਦੇ ਖੋਬੇ ਦਾ ਹੋਵੇ ਬੋਧਾ ਹੋਵੇ ਹੋਵੇ ਪੈਰ ਦਾ ਹੋਵੇ ਚਾਰ ਭਾਰ ਹੋਵੇ ਉਹ ਦੇ ਕੋ ਪਰਬ ਦਾ ਹੈ ਜਿਹੜਾ ਕੋਈ ਵੀ ਭਾਰ ਪ੍ਰਦਾਨ ਹੋਵੇ ਸਾਰੇ ਲੈ ਜਾਂਦੇ ਕੋਈ ਫਰਕ ਨਹੀਂ ਪੈਂਦਾ ਹਰੇਕ ਭਾਰ ਤੇ ਨਾਮ ਕੰਮ ਕਰਦਾ ਹੈ ਹਰੇਕ ਤਰਤੀ ਤੇ ਕੋਈ ਹਿੱਸਾ ਹੋਵੇ ਢੰ ਕੋਈ ਹੋਵੇ ਨਾਮ ਕਿਸੇ ਵੀ ਇਦਨ ਜਪਿਆ ਆ ਯਾਰ ਸਮਝਿਆ ਹੋਇਆ ਗੁਰਬਾਣੀ ਕਿਸੇ ਦਿਨ ਸਮਝ ਲੋ ਕਿਤੇ ਬੈਠ ਕੇ ਸਮਝ ਲੋ ਇੱਕੋ ਹੀ ਗੱਲ ਦਾ ਕੋਈ ਫਤਵੀ ਕਿੰਨੇ ਲੋਕ ਗੁਰਦਾਰੇ ਜਾ ਕੇ ਗੁਰਤਾ ਲੈ ਕੇ ਪੜਨ ਉਹ ਸਮਝਦੇ ਨੇ ਮਿਲਦਾ ਜਿਵੇਂ ਇੱਥੇ ਮਰੂਆ ਇੱਥੇ ਖੰਡ ਪਾਠ ਕਰਾਏ ਇੱਥੇ ਜਾਦਾ ਫਲ ਹੈ ਇੱਥੇ ਘੱਟ ਫਲ ਇਹ ਉਹ ਸ਼ੰਕਾ ਨੂੰ ਦੂਰ ਕਰਨ ਵਾਲੀ ਪੰਕਤੀ ਸੀ ਪਰ ਉਹ ਸ਼ੰਕਾ ਫੇਰ ਖੜੀ ਕਰਤੀ ਹਾਂਜੀ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰਿਆ ਖੰਡ ਸਭ ਸਭ ਲੋ ਲੋ ਆਕਾਰ ਜਿਵੇਂ ਸਭੇ ਪਾਣੀ ਉਹ ਦੇ ਜਲ ਨੂੰ ਜੰਨਾ ਸਭ ਨੇ ਲੈ ਕੇ ਆਉਂਦੇ ਨੇ ਸਾਡੇ ਹਮ ਕਈ ਸੋਗਰਾਂ ਦੇ ਪਾਣੀ ਲੈਣ ਲੱਗੇ ਦੇਣ ਲੱਗੇ ਉਹ ਪਾਣੀ ਕਿਤੇ ਦਾ ਵੀ ਹੋਵੇ ਪਾਣੀ ਦੀ ਕੋਈ ਫਰਕ ਨਹੀਂ ਪਾਏ ਪਾਣੀ ਸਪਾਇਆ ਹੀ ਹੈ ਸਭੇ ਪਾਣੀ ਪਾਉਣ ਸਭ ਹਵਾ ਕਿਤੇ ਦੀ ਹੋਵੇ ਜਿਹੜੀ ਹਵਾ ਚ ਆਕਸੀਜਨ ਹੈ ਉਹ ਠੀਕ ਹੈ ਹਵਾ ਸਾਰੇ ਸਾਲ ਇੱਧਰ ਦੁਨੀਆ ਚ ਸਾਰੇ ਤੇ ਤਿਆਰ ਆਵਾ ਪਾਲੇ ਜੀ ਨਾਲ ਸੰਬੰਧ ਹੈ ਪਾਣੀ ਹਵਾ ਦਾ ਸਭੇ ਪੁਰੀਆਂ ਕੋਈ ਵੀ ਪੁਰੀ ਹੋਵੇ ਤੇ ਪੁਰੀਆਂ ਬੰਦੀਆਂ ਆਈਆਂ ਨੇ ਇੱਧਰ ਪੁਰੀ ਹੋਵੇ ਪਰ ਪੁਰੀ ਹੋਵੇ ਜਿਹੜੀਆਂ ਬੰਦੀਆਂ ਆਉਣ ਜਾਂ ਕਿ ਮਸ਼ਾਲ ਨੇ ਜਿਵੇਂ ਇਹਨਾਂ ਨੇ ਕਾਸ਼ੀ ਤੋਂ ਪੁਰੀ ਬੰਦੀਆਂ ਆਇਆ ਕੋਈ ਆਪਾਂ ਆਪਣੇ ਪਰਸਾ ਤੋਂ ਬੰਦੀਏ ਹੋਰ ਬੰਦੀਏ ਇਹ ਇਹ ਕੋਈ ਫਰਕ ਨਹੀਂ ਹੈ ਸਭ ਅਗਨੀ ਪਾਤਾਲ ਤੋਂ ਕੀ ਪਾ ਬੰਨਦਾ? ਪਾਣੀ ਕਿਸਮ ਦੀ ਅਗਨੀ? ਹਾਂ ਪਾਤਾਲ ਕੀ ਹੁੰਦਾ? ਉਹ ਪਾਤਾਲ ਵੀ ਖਾਸ ਕਿਸਮ ਦੇ ਹਨ ਪਾਤਾਲ ਬੰਦੇ ਹੋਏ ਨੇ ਇਸ ਦੁਬਤ ਵੇ। ਥੱਲੇ ਦਾ ਐਸਾ ਜੀਵ ਤੇ ਉਸ ਵੀ ਘਰ ਠੀ ਕਹਤੀ ਥੱਲੇ ਦਾ ਪਾਤਾਲ ਕਹਤਾ। ਸਬੂਦਰ ਦੇ ਵਿੱਚ ਬਹੁਤ ਗਹਿਰਾਈ ਜਿਹੜੇ ਰਹਿੰਦੇ ਨੇ ਜੀ ਉਹ ਪਾਤਾਲ ਤੇ ਜੀ। ਸਭ ਆਕਾਰ। ਸਾਰੇ ਆਕਾਰ ਨੇ ਔਰ ਸਾਰਿਆਂ ਦੇ ਵਿੱਚ ਜੋਤ ਹੈ। ਜਿਦਿਆ ਅਕਾਲ ਨੇ ਸਾਰਾ ਕਿ ਜੋ ਤਾਂ ਲੋ ਹੈਗੀ ਆ ਹਾਂਜੀ ਹੁਕਮ ਨਾਲ Japhi ਨਾ ਸਕੀਜੈ ਕਾਰ ਆਖ ਆਖ ਕਰ ਸਿਫਤੀ ਵਿਚਾਰ ਹੁਕਮ ਨਾਲ Japhi ਹੁਕਮ ਨਾਲ ਹੀ ਪਤਾ ਕਿੱਡਾ ਸਾਰੇ ਭਾਂਡ ਵਰਸਦਾ ਸਾਰੇ ਹੁਕਮ ਨਾਲ ਜਬਦੇ ਨੇ ਹੁਕਮ ਨਾਲ ਵਰਤੇ ਹੁਕਮ ਨਾਲੇ ਸਾਰਿਆਂ ਨੂੰ ਰੋਚੀ ਮਿਲਦੀ ਏ ਫੇ ਹੁਕਮ ਤਾਂ ਭਾਈ ਸਾਰੇ ਜਿੱਥੇ ਜੀਵ ਹੈ ਉਥੇ ਹੁਕਮ ਹੈ ਸਾਰੇ ਉਹਦਾ ਜੀਵਨ ਹੁਕਮ ਨਾਲੇ ਚੱਲਦਾ ਹੁਕਮ ਨਾਲੇ ਰੋਜ਼ੀ ਰਿਜ਼ਕ ਸਭ ਉਹ ਦਿੰਦਾ ਹੱਜ ਗਈ ਆ ਫਿਰ ਤੇ ਚੰਦਾ ਬਾੜਾ ਕਿਹੜੇ ਆਧਾਰ ਤੇ ਖੁੱਦੀ ਬੈਠੇ ਹੋ ਤੁਸੀਂ ਵੀ ਆ ਜਗਾ ਚੰਗੀ ਆ ਹੈ ਹੁਕਮ ਨਾਲ ਜਾਪੀ ਕਿਹੜਾ ਤੁਸੀਂ ਨਹੀਂ ਕਹਿ ਸਕਦੇ ਹੁਕਮ ਕਿੱਥੇ ਤੱਕ ਆਦਾ ਪਾ ਇੱਕ ਧਰਤੀ ਦੀ ਗੱਲ ਕਰ ਰਹੇ ਹੋ ਸਭ ਨਾ ਧਰਤੀਆਂ ਨੇ ਜਿੱਥੇ ਜਿੱਥੇ ਜੀਵਨ ਸਾਰੇ ਹੁਕਮ ਹਾਂਜੀ ਕਹੇ ਨਾ ਸਕੀਜੇ ਹੁਕਮ ਜੋ ਕੁਝ ਕਰ ਰਹੇ ਸਭ ਕੁਝ ਕਿੱਥੇ ਤੱਕ ਇਹ ਸਾਰੀ ਸ੍ਰਿਸ਼ਟੀ ਕਾਰ ਉਹਦੀ ਕਿੱਥੇ ਤੱਕ ਹੈ ਇਹ ਵੀ ਨਹੀਂ ਕੋਈ ਤਸਰ ਰ ਇਹ ਤਾਂ ਛੋਟਾ ਜਿਹਾ ਸਿਲੇਬਸ ਹੈ ਸਾਡਾ ਤਾਂ ਇਸ ਕਰਕੇ ਮਾਇਆ ਦੀ ਗੱਲ ਨਹੀਂ ਕੀਤੀ ਬਹੁਤ ਗੁਰਬਾਣੀ ਹੈ ਸਾਡਾ ਸਿਲੇਬਸ ਮਾਇਆ ਨੂੰ ਪੂਪਾ ਛੱਡੀ ਕਰਨਾ ਦੀ ਹੈ ਤੇ ਕੌਣ ਪਰਮੇਸ਼ਰ ਦਾ ਕਿੱਥੇ ਤੱਕ ਹੈ ਕੀ ਕਰ ਰਿਹਾ ਸਾਡਾ ਇਹ ਹੈ ਅਸੀਂ ਖੂਜ ਡੇਗੇ ਨਿਕਲਣਾ ਜੋ ਕੁਝ ਕਰਨਾ ਹੈ ਸਾਰਾ ਬਾਲਰਟੀ ਕੀਤਾ ਜਾਂਦਾ ਹੈ ਅਜਿਹਾ ਹਸਨ ਜੀ ਆਖਾਂ ਥੱਕੇ ਆਖ ਆਖ ਕਰ ਸ਼ਿਫਤੀ ਵਿਚਾਰ ਤੇਰੇ ਆਖਦੇ ਰਹੇ ਮਤਲਬ ਆ ਰਿਸ਼ੀ ਮੁਰਿਆ ਦੇ ਬਹੁਤ ਕੁਝ ਕਿਹਾ ਆਖ ਆਖੇ ਥੱਕ ਕੇ ਕਿਸੇ ਨੂੰ ਨਹੀਂ ਪਤਾ ਲੱਗਿਆ ਆਖਰ ਬ੍ਰਹਮਾ ਨੇ ਬੇਅੰਤ ਬੇਅੰਤ ਕਹਿ ਕੇ ਖੜਾ ਹੀ ਛੜਾਇਆ ਚਿਤਸਲਾ ਵੀ ਕੀਤੀ ਬਸ ਜੀ ਕਹੋ ਅਖੀਰ ਉਹ ਬੇਅੰਤ ਹੈ ਉਹ ਤੇ ਰਾਤਰੀ ਪਾਇਆ ਜਾ ਸਕਦਾ ਜਿਹੜਾ ਤੇਰੀ ਸਫਸਲਾਦੀ ਕਥਾ ਇਹ ਵੀ ਇੱਕ ਕਥਾ ਹੈ ਕਦੋਂ ਕੀਤੇ ਜਾ ਸਕਦੇ ਕੋਤ ਬੁਝਣ ਵਾਲੀ ਗੱਲ ਫੇਰ ਉੱਥੇ ਚੜੀ ਜਿੱਦਾਂ ਵਰਜੀ ਕਤਲ ਨਾਲ ਬੁਝਣ ਵਾਲੀ ਗੱਲ ਫੇਰ ਉੱਥੇ ਠਿਗੜੀ ਤਵੀਰ ਨੇ ਪਹਿਲਾਂ ਕ ਬਾਣੀ ਰਚੀ ਸੀ ਸਾਰਾ ਗਿਆਨ ਦੱਸਦਾ ਸੀ ਉਹਦਾ ਵਿਆਖਿਆ ਗੁਰੂਆਂ ਨੇ ਕੀਤੀ ਗੁਰੂ ਘਰ ਨੇ ਵਿਆਖਿਆ ਕੀਤੀ ਉਹਦੀ ਬਹੁਤ ਜ਼ਿਆਦਾ ਪਰ ਬੁਝਣ ਵਾਲੀ ਗੱਲ ਫੇਰ ਉੱਥੇ ਚੜੀ ਇਸ ਕਰਕੇ ਬੁਝਣ ਵਾਲੀ ਗੱਲ ਉੱਥੇ ਹੀ ਰਹੂਗੀ ਜਿੱਦਾਂ ਵਰਜੀ ਇਹਨੂੰ ਵਧਾ ਲਓ ਗੁਰਪਾਣੀ ਰਚਣ ਦਾ ਇੱਕ ਮਤਲਬ ਇਹ ਹੋਇਆ ਕਿ ਜਿੱਦੀ ਜਲਦੀ ਭਗਤ ਬਾਣੀ ਨੂੰ ਇਹਨੇ ਉਲਟੇ ਰਾਹ ਪਾਤਾ ਜੀ ਉਹਦੀ ਜਲਦੀ ਇਹ ਨਹੀਂ ਗੁਰਬਾਣੀ ਨੂੰ ਪਾਈ ਜਾ ਸਕਦੀ ਉਲਟੇ ਰਾਹ ਜੇ ਧਿਆਨ ਨਾਲ ਅਸੀਂ ਪੜੀਏ ਪਰ ਧਿਆਨ ਨਾਲ ਵੀ ਪੜਿਆ ਹੀ ਨਹੀਂ ਹੈ ਤੇ ਅੱਜ ਤੱਕ ਨਹੀਂ ਲਿਖਿਆ ਹੋਇਆ ਕੁਝ ਹੈ ਅਸੀਂ ਕੁਝ ਹੱਥ ਕਰੀ ਜਾਂਦੇ ਤੇ ਨਾਲਦ ਕਰਕੇ ਦੇਖਿਆ ਅੱਖਾਂ ਵਿੱਚ ਕਿਉਂ ਹੀ ਕਰੀ ਜਾਂਦੇ ਜੀ ਉਲਟੇ ਰਸਤੇ ਪਾਇਆ ਜਾਦਾ ਜੇ ਧਿਆਨ ਨਾਲ ਪੜੀਏ ਤੇ ਅੰਧੇਨ ਦੀ ਲੋੜ ਕੋਈ ਦੀ ਲੋੜ ਸੀ ਖੋਜ ਦਾ ਬੇਸ਼ੱਕ ਅਸੀਂ ਖੋਜ ਅਸੀਂ ਕੀਤੀ ਸੀ ਕਿਸੇ ਵਿਦਵਾਨ ਦੇ ਹੱਥ ਕਰਕੇ ਦੇ ਤੇ ਵੱਖੀ ਮਾਰੀ ਜਾਂਦੇ ਨੇ ਕੌਣ ਪੜੀ ਜਾਂਦੀਆਂ ਨੇ ਗਲਤੀਆਂ ਜੇ ਧਿਆਨ ਨਾਲ ਅਸੀਂ ਪੜਦੇ ਹਾਂਜੀ ਗਵਾਰ ਫਿਰਣਾ ਪਾਇਓ ਬੱਪੜੀ ਪਿੰਡ ਜਿੰਨਾ ਵੀ ਕਿਸੇ ਦਾ ਭੇਦ ਦੀਪਾ ਕਹਿ ਦਾਰੋ ਫਿਰ ਵੀ ਜਿਹੜੇ ਕਹਿ ਅਸੀਂ ਪਾਲਿਆ ਕੁਛ ਇਹ ਕਰ ਲਿਆ ਉਹ ਕਰ ਲਿਆ ਉਹ ਗਵਾਰ ਨੇ ਉਹ ਕਹਿਣ ਵਾਲਿਆਂ ਨੇ ਜਿਹੜੇ ਕਹਿਣਾਂ ਨਾ ਪੈਂਦੀ ਪਾਲਿਆ ਮੈਂ ਵੀ ਪਾਲਿਆ ਜਨਾ ਸਭ ਕੋ ਕਹਿਆ ਸਤਿਗੁਰੂ ਤੇ ਜਾਣੇ ਉਹ ਗਵਾਰ ਲੋਕ ਨੇ 18 ਗਵਾਰ ਲਿਖ ਦਿੱਤੇ ਤਰਤੀਰੇ ਉਹ ਲਿਖ ਤਾ ਉਹਨਾਂ ਨੂੰ ਗਵਾਰ ਗੁੱਦੀਏ ਗੁਰਵਾਨੀ ਹਾਂਜੀ ਮਹੱਲਾ ਪਹਿਲਾ ਅੱਖੀਂ ਪੜਨਾ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਬੇਦ ਵਿਚਾਰ ਆਹ ਅੱਖੀਂ ਜੇ ਫਿਰ ਹੁਣ ਅੱਖਾਂ ਦੇ ਪੜਨੇ ਸਿਰ ਦੀ ਤਾਂ ਗੱਲ ਆ ਗਈ ਸਿਰ ਪੜਨੇ ਫਿਰ ਦੀ ਗੱਲ ਇਸ ਕਰਕੇ ਨਹੀਂ ਆ ਸਰ ਸਿਰ ਇੱਕ ਹੈ ਅੱਖਾਂ ਦੋ ਨੇ ਅੱਖੀ ਪੜਨਾ ਜੇ ਫਰਾਂ ਦਾ ਮਤਲਬ ਹੈ ਜੇ ਮੈਂ ਅੱਖਾਂ ਖੋਲ ਕੇ ਚੱਲਾਂ ਦੋ ਅੱਖਾਂ ਬੰਦ ਕਰਕੇ ਚੱਲਦੇ ਨੇ ਮਤਲਬ ਇਹ ਹੈ ਜੇ ਕਿਸੇ ਨੇ ਉਹ ਗੱਲ ਕਿਸੇ ਨੇ ਕਹਿ ਤੀ ਨਾ ਗਲਤ ਉਹ ਨੂੰ ਵਿਚਾਰ ਦੇ ਪਾਸੇ ਫਿਰਦੇ ਆ ਫਿਰ ਦੋ ਅੱਖਾਂ ਨੇ ਜਿਹਾ ਪਰੜਕਦੇ ਆ ਨਾ ਕਿਸੇ ਚੀਜ਼ ਨੂੰ ਬਾਣਾ ਦਿੱਤ ਦੋ ਅੱਖਾਂ ਨੇ ਚਾ ਦੋਹਾਂ ਵਿੱਚ ਵਿਚਾਰ ਕੇ ਦੇਖੋ ਹਨ ਦੀ ਗੱਲ ਮਨ ਮੁਖੀ ਬਸਦੇ ਗੁਰਮਖਾਂ ਦੀ ਗੱਲ ਗੁਰਮਖੀ ਬਸਦੇ ਗੁਰਮਖਾਂ ਦੀ ਗੱਲ ਮਨ ਮੁਖੀ ਬਸਦੇ ਜਿਹੜੇ ਬੰਦੇ ਨੇ ਉਹ ਬਨੁਖ ਦੀ ਹੁੰਦੇ ਦਾ ਗੁਰਮਖੇ ਨੇ ਉਹ ਪੂਰੀ ਤਰ੍ਹਾਂ ਸੁਤੋਸ਼ਪਤੀ ਹੁੰਦੇ ਸਾਲੀਗਲ ਨੂੰ ਜੀ ਵੀ ਸਾਡੇ ਕੋਲ ਆ ਠੀਕ ਹੈ ਸਾਬ ਸਰੂ ਦੇਵੀ ਹੋਰ ਵੀ ਜਿਹੜੇ ਗੁਰਮਖੀਓ ਸਤੋਸ਼ਪਤੀ ਸੀ ਇਹਨਾਂ ਨੂੰ ਪਤਾ ਵੀ ਕੁਛ ਨਾ ਕੁਛ ਰਹਿ ਗਿਆ ਪਰ ਕੁਛ ਨਾ ਕੁਛ ਹੈ ਨਹੀਂ ਸੀ ਉਹਨਾਂ ਕੋਲ ਉਹਨਾਂ ਦੀ ਆਪਣੀ ਉਹ ਤਾਂ ਨਹੀਂ ਆਈ ਜੋ ਕੋਈ ਜ਼ਿਆਦਾ ਬਣਦਾ ਸੀ ਹੋਰ ਬਣਦਾ ਸੀ ਲੈ ਲੈਂਦੇ ਸੀ ਕੋਈ ਨਹੀਂ ਹੁਣ ਜਿਨ੍ਹਾਂ ਨੇ ਫਟਾਫਟ ਉਹ ਛੱਡ ਕੇ ਜਦ ਲਾਈਟ ਬਦਲਦੀ ਵੀ ਆ ਗੱਲ ਠੀਕ ਹੈ ਅਗੇ ਰੋ ਜਦੋਂ ਉਹਨਾਂ ਨੂੰ ਬੈਂਟਲ ਗੱਲ ਮਿਲਦੀ ਹੈ ਤਿਹੜੀ ਕਰ ਦਿੰਦੇ ਉਹ ਅਸਲ ਜਮਾਨ ਮੁਖੀ ਉੱਤੇ ਉੱਤੇ ਡਾ ਗੁਰਮੁਖੇ ਨੇ ਪਰ ਉਹ ਉਹਨਾਂ ਦੀ ਆਪਣੀ ਬੁੱਧੀ ਨੂੰ ਗੁਰਮੁਖੇ ਦੀ ਗੱਲ ਕੋਦੋ ਬੁੱਧੀ ਨੂੰ ਕਬੂਲ ਬੋਲਣਾ ਜੇ ਬਈ ਬੁੱਧੀ ਨੂੰ ਕਬੂਲ ਉਹ ਪੱਥਰ ਹੋ ਜਾਂਦਾ ਬਦਗੁੱਪ ਤਾਂ ਭਿਜਾ ਪੱਥਰ ਨਾ ਪੁੱਛਾਂ ਗਿਆਨੀ ਪੰਡਤਾਂ ਪੁੱਛਾਂ ਬੇਦ ਵਿਚਾਰ ਗੱਦੀਆਂ ਪਰ ਤਾਂ ਜਾ ਕੇ ਪੁੱਛਾਂ ਪਹਿਲਾਂ ਤਾਂ ਆਪ ਵਿਚਾਰਾਂ ਅੱਖੀ ਪਲਦੇ ਨਹੀਂ ਫਿਰ ਅੱਖਾਂ ਖੋਲ ਕੇ ਫਿਰ ਫਿਰ ਹੋਰ ਆਪ ਤੇ ਗੱਦੀਏ ਨੂੰ ਕਣਕਾਂ ਨੂੰ ਪੁੱਛਾਂ ਵੀ ਆਹ ਗੱਲ ਕਿਵੇਂ ਲੱਗਦੀ ਹੈ ਮੈਨੂੰ ਤਾਂ ਠੀਕ ਨਹੀਂ ਲੱਗਦੀ ਵੀ ਇਸ ਤਾਂ ਬਾਹਰ ਹੈ ਤੁਸੀਂ ਦੱਸੋ ਇਹਦਾ ਨਾ ਵਿਚਾਰ ਕਰ ਦਿੱਤਾ ਇੱਥੋਂ ਵਿਚਾਰ ਸ਼ੁਰੂ ਹੋ ਵੀ ਵਿਚਾਰ ਦਾ ਤਾਂ ਹੈ ਆਦੇਸ਼ ਜਿਦਾ ਜਿਦਾ ਕੁਰਬਾਨੀ ਨੂੰ ਵਿਚਾਰਨਾ ਸਿੱਖੋਂ ਨੂੰ ਇਕੱਠੇ ਹੋ ਕੇ ਵਿਚਾਰਨਾ ਪਰ ਬਹਿਸ ਤਾਂ ਵਿਸ਼ਾ ਤਾਂ ਹੈ ਜੀ ਹੈ रिकॉर्ड परका विषय बना के भेजो बाकी भी, भी। थे तांहे के मेरी बंदूक और होगी वो भी नाश हो जाती है मैच में विचार का विषय है गुरु कुछ विचार हो जाते सारे गल गए तो ठीक नहीं लगली विचार लो ਪੁਛਾ ਦੇਵਾ ਮਾਨਸਾ ਜੋਤ ਕਰੇ ਅਵਤਾਰ ਸਿਧ ਸਮਾਦ ਸਭ ਸੁਣੀ ਜਾਏ ਦੇਖਾਂ ਦਰਬਾਰ ਦੇਵਤੇ ਨੂੰ ਪੁੱਛਿਆ ਜਿਹੜਾ ਲੋਕ ਚੱਦੇ ਦੇਵਤੇ ਤੋਂ ਤੇ ਆਦਮੀ ਵੀ ਨਹੀਂ ਜਿਹੜੇ ਆਪਣੇ ਆਪ ਨੂੰ ਆਦਮੀ ਹੋ ਗਏ ਤੇ ਰਵਾਨੀ ਤੋਂ ਗੁਰੂ ਆਨੇ ਆਪਣੇ ਆਪ ਨੂੰ ਦੇਵਤੇ ਨਹੀਂ ਬਣਦੇ ਮਾਨਸ ਲਈ ਪੁੱਛੀਏ ਮਾਨਸ ਕੀ ਜਾਨ ਸਦਾ ਇਹ ਮਾਨਸ ਬਣਦੀ ਹੈ ਸਰੀਰ ਆਲਾ ਜੇ ਤਾਰੀ ਹੈ ਮਾਨਸ ਦੇਵਤਾ ਕਰ ਦੇਵਤਾ ਜਦੋਂ ਲੱਭਾਈ ਦੀ ਅੰਦਰ ਦੇਵ ਨੂੰ ਜਾਣੀ ਹੁੰਦ ਅੰਦਰ ਨਹੀਂ ਜਾਂਦਾ ਦੇਵਤ ਦਾ ओरिजिनल ਮਲਦਾ ਹੁੰਦਾ ਕਿ ਮਾਨਸਰ ਦੇਵਾਂ ਚਲੋ ਕੋਈ ਗੱਲ ਦੀ ਕੋਨਾ ਕੋਨਾ ਸ਼ਾਇਦ ਕੋਈ ਗੱਲ ਵਿਲੇ ਚੰਗੀ ਬਾਣ ਨੂੰ ਪੁੱਛਾਂ ਜਿਹੜੇ ਬੋਲਣ ਸ ਆਪਣੇ ਆਪ ਨੂੰ ਜਿਹੜੇ ਯੋਧੇ ਹੋਏ ਨੇ અવਤਾਰ ਕਹਾਏ ਨੇ ਉਹਨਾਂ ਨੂੰ ਪੁੱਛ ਲੈਦੇ ਉਹਨਾਂ ਨੂੰ ਪੜ ਲੈਂਦੇ ਉਹਨਾਂ ਨੇ ਜੋ ਗੱਲਾਂ ਕਹੀਆਂ ਨੇ ਉਹਨਾਂ ਤੋਂ ਪੁੱਛ ਲੈਦੇ ਉਹਨਾਂ ਦਾ ਲਿਖਿਆ ਹੋਇਆ ਜਿਵੇਂ ਕ੍ਰਿਸ਼ਨ ਦੀ ਗੀਤਾ ਲਿਖੀ ਹੋਈ ਹੈ ਹੋਰ ਜੀਤਾਇਆ ਕਰੀ ਸਭ ਕੋਰਾ ਤੋਂ ਪੁੱਛ ਲੈਦੇ ਹਾਂ ਜੀ ਸਿੱਧ ਸਮਾਧੀ ਸਭ ਸੁਣੀ ਜਾਇ ਦੇਖਾਂ ਦਰਬਾਰ ਜਿਹਨੇ ਸਮਾਧੀ ਲਾਜ਼ ਲਈ ਇਹਦੇ ਬਾਰੇ ਵੀ ਸਭ ਕੁਝ ਜਾਣਕਾਰੀ ਲੈ ਲਵਾਂ ਕੋਈ ਗੱਲ ਨਹੀਂ ਜਿੱਥੋਂ ਮਿਲਦੀ ਹੈ ਜਾਣਕਾਰੀ ਲੈ ਸਕਦੇ ਆਪਾਂ ਖਾਣੇ ਵਾਸਤੇ ਲੈਣਾ ਸਭ ਕੁਝ ਖਾਣੇ ਵਾਸਤੇ ਕਰਨਾ ਜਾਇ ਦੇਖਾਂ ਸਰਵਾਰ ਜਿੱਥੋਂ ਦਰਵਾਜ਼ਾ ਪਹੁੰਚਾ ਦਰਸ਼ਨ ਹੋ ਜਾਣ ਜਿੱਥੇ ਵੀ ਦਰਬਾਰ ਕਹਿੰਦੇ ਨੇ ਹੈਗਾ ਕਿਨ ਉਹ ਦਾ ਦਰਸ਼ਨ ਹੋਣਾ ਚਾਹੀਦਾ ਮੈਂ ਕਿਤੇ ਵੀ ਜਾਣ ਨੂੰ ਪਿਆਰ ਦੇਵਤਾ ਹੋਵੇ ਫਾਂਸੋਂ ਦੇ ਪਤਾ ਸ਼ਰਤ ਪੂਰੀ ਕਰੇ ਸਰਹੰਗ ਕਰਾਵੇ ਦਰਵਾਜ਼ੇ ਜੀ ਅੱਗੇ ਸੱਚਾ ਅੱਗੇ ਤਾਂ ਸੱਚਾ ਕਿੱਥੇ ਜਾਣਾ ਉੱਥੇ ਤਾਂ ਸੱਚਾ ਉੱਥੇ ਜੂਠੀ ਚੱਲਦਾ ਸੰਸਾਰ ਦੇ ਵਿੱਚ ਜੂਠ ਬੋਲੀ ਜਾਂਦੇ ਉਹ ਠਾਕਾ ਦੇ ਦਰਸ਼ਨ ਹੋ ਗਏ ਜੀ ਉਹ ਹੋ ਗਿਆ ਨਾਮਦੇਵ ਨੇ ਮੰਤਰ ਫੇਰ ਗਿਆ ਉਹ ਹੋ ਗਿਆ ਇਹ ਦੂਜਾ ਅੱਗੇ ਦਾ ਚਲਣਾ ਵੀ ਦੂਜਾ ਅੱਗੇ ਸੱਚਾ ਹੈ ਸੱਚ ਨਾ ਉਹਦਾ ਨਾਂ ਵੀ ਬੜੇ ਤੋਂ ਦੀ ਵੀ ਪੈ ਕਰਦਾ ਅਵਤਾਰ ਹੋਊ ਆਪਣੇ ਕਰਨੂ ਹੋਏਗਾ ਉਹਦੇ ਸਾਹਮਣੇ ਕੋਈ ਅਵਤਾਰ ਦੀ ਕੋਈ ਵੱਡਾ ਦੀ ਪੈ ਬਿਨਸਾਰ ਪੈ ਹਾਂਜੀ ਹੋਰ ਕੱਚੀ ਮੱਤੀ ਕੱਚ ਵਿੱਚ ਅੰਧਿਆਂ ਅੰਧ ਵਿਚਾਰ ਸਾਰ ਜਿਹੜੀ ਗੱਲ ਐ ਸਾਰ ਗੱਲ ਐ ਸੱਚ ਦੀ ਗੱਲ ਐ ਪਿੰਡ ਸਾਰ ਸਾਰ ਤੋਂ ਬਿਨਾ ਹੋਰ ਕੱਚੀ ਮੱਤੀ ਕੱਚੇ ਮਤਾਂ ਨੇ ਸਾਰ ਗਿਆ ਅੰਧਈ ਹੈ ਜਿੱਥੇ ਕੱਚੀਆਂ ਮਤਾਂ ਕੱਚ ਪਿੱਤ ਬੋਲਦੇ ਰਿਓ ਕੱਟੀ ਉਹਦਾਂ ਕਈਓ ਜਿਓ ਅੰਧਿਆਂ ਅੰਧ ਵਿਚਾਰ ਅੰਨੇ ਨੇ ਗਿਆਨ ਤੋਂ ਸਖਣੇ ਦੇ ਪਰ ਗਿਆਂ ਦੀ ਇਹ ਜਾਈ ਪਰ ਦਾ ਪ੍ਰਚਾਰ ਕਰਦੇ ਨੇ ਇਹ ਜੇ ਉਹਨਾਂ ਦੇ ਵਿਚਾਰ ਨੇ ਔਰ ਪੈਦਾ ਕਰਦੇ ਵਾਲੇ ਵਿਚਾਰ ਤੁਹਾਨੂੰ ਦੱਸਣਗੇ ਵਿਚਾਰ ਧਾਰ ਹੈ ਰੋਦੀ ਜੀ ਨਾਨਕ ਕਰਮੀ ਬੰਦਗੀ ਨਦਰ ਲੰਘਾਂ ਪਾਰ ਕਾਨਕਨਾਂ ਕਰਮੀ ਬੰਦਗੀ ਜਿਹਦੇ ਤੇ ਕਿਰਪਾ ਹੋਵੇ ਉਹ ਬੰਦਗੀ ਕਰਦਾ ਹੈ ਬੰਦਗੀ ਹੁਕਮ ਤੇ ਪਾੜੇ ਜਿਹੇ ਦਾ ਪਾੜੇ ਚੱਲੇ ਬੰਦਗੀ ਜੇ ਬੰਦੇ ਬੰਦਗੀ ਇਖਤियार ਪਾੜੇ ਚੱਲ ਬੰਦਾ ਥੋਜ ਰਹੇ ਵਿੱਚ ਬੰਦੀ ਜੋ ਹੁਕਮ ਜਰਾਇਓ ਹੀ ਬਸ ਉਹ ਜੇੜ ਚ ਪਾਣਾ ਰੱਖ ਚੁੱਪ ਨਾ ਨੀ ਸਰੋਂਦੇ ਨੇ ਪਰ ਦੂਰ ਬੰਨਣਾ ਨੀ ਨੇ ਜਿਹੜੇ ਤਨੂਤ ਨੇ ਜਿਹੜੇ ਤਾਂ ਰੱਖਦੇ ਨੇ ਵੀ ਉਹ ਤੂੰ ਹੁਕਮ ਚ ਰਹਿਣ ਦੀ ਅਸਲ ਆਜਵੇ ਤੇ ਅਦਰੇ ਨਾਲ ਆਇ ਕਿਰਪਾ ਹੋ ਜਾਂਦੀ ਹੈ ਉਹ ਬਸ ਉਹਨੂੰ ਛੁਟਕਾਰਾ ਹੋ ਜਾਂਦਾ ਜਿਹੜਾ ਹੁਕਮ ਚ ਪਾੜੇ ਚ ਰਹਿਣਾ ਸਿੱਖ ਲੈਂਦਾ ਸਭ ਬਦਲ ਲੈਂਦਾ ਆਪਣਾ ਆਪਣੇ ਪਾੜੇ ਚੱਲਣਾ ਛੱਡ ਕੇ ਗੁਰੂ ਦੇ ਰਹਿਣਾ ਹੁਕਮ ਦੇ ਵਿੱਚ ਰਹਿਣਾ ਸਿੱਖ ਲੈਦੇ ਸਵਾ ਬਦਲ ਲੈਦਾ ਉਹ ਨੂੰ ਇੱਥੇ ਛੁਟਖਾ ਲ ਮਿਲ ਜਾਂਦਾ ਠੀਕ ਹੈ ਜੀ ਬਾਹਰ ਹੋ ਜਾਂਦੇ ਬੱਸ ਸਾਡੇ ਹਾਂ ਜੀ ਔੜੀ ਨਾਏ ਮੰਨੀਏ ਦੁਰਮਤ ਮਤ ਪ੍ਰਗਤੀ ਆਇਆ ਨਾਉ ਮੰਨੀਏ ਹਉਮੈ ਗਈ ਸਭ ਰੋਗ ਗਵਾਇਆ ਦਖੋ ਨਾਏ ਮੰਨੀਏ ਗੱਲ ਨਾ ਉਹ ਦੀ ਚੱਲਦੀ ਹੈ ਪਾਣਾ ਮੰਨੇ ਤਾਂ ਬੇਨਾਂ ਨਾਲ ਪਾਣੀ ਬੰਦ ਦੁਰਮਤ ਨਹੀਂ ਜਾ ਸਕਦੀ ਕਹਿੰਦੇ ਦੁਰਮਤ ਜਦ ਗਈ ਆ ਉਹ ਗਈ ਆ ਜਿਹਨੇ ਪਾਉਣਾ ਬੰਦ ਕਰ ਦਿੱਤਾ ਦੁਰਮਤ ਕੀ ਆ ਆਪਣੇ ਪਾਣੀ ਚੱਲਣਾ ਦੁਰਮਤ ਆਪਣੇ ਪਾਣੀ ਦਾ ਤਿਆਰ ਕਰਕੇ ਗੁਰਕੇ ਪਾਣੀ ਚੱਲਣਾ ਗੁਰਮਤਿ ਦੁਰਮਤ ਚਲੀ ਜਾਂਦੀ ਆ ਮਤ ਪ੍ਰਗਟ ਆਏ ਜਿਹੜੀ ਮਤੁੱਤੀ ਪਈ ਸੀ ਨਾ ਥੋਈ ਥੋਈ ਜਾਗੀ ਮਤ ਪ੍ਰਗਟ ਆਇਆ ਆਇਆ ਦੇਖੋ ਆਇਆ ਲਖਨਵਾਲਾ ਤੇ ਮਤ ਜੇ ਪ੍ਰਗਟ ਹੁੰਦੀ ਆ ਬਸ ਆਪਣੇ ਘਰ ਆ ਜਾਂਦਾ ਬਹੁਤ ਸਰਕੂਟੀ ਛੱਡ ਕੇ ਹਿਰਦੇ ਜਾ ਕੇ ਟਿਕ ਜਾਂਦਾ ਕੋਈ ਚੱਲਣਾ ਨਾ ਲੱਗ ਜਾਂਦਾ ਇੱਥੇ ਆਇਆ ਲਫਜ਼ ਵਰਤੇਗਾ ਕਿਉਂਕਿ ਸੱਚਾ ਢ ਘੁਰਤੀ ਬਾਣੀ ਆ ਨਾ ਉੱਥੋਂ ਬੋਲੀ ਗੱਲ ਠੀਕ ਆ ਆਇਆ ਨੋ ਨੋ ਬੰਦੀ ਐ ਹੋਬੇ ਗਈ ਹੋਬੇ ਚਲੀ ਗਈ ਹੋਬੇ ਕੀ ਸੀ ਹੋਬੇ ਆਪਣੇ ਪਾਸੇ ਚੱਲਣ ਹੋ ਗਏ ਚੱਲਣਾ ਹੋ ਬੰਨਾ ਹੋਬੇ ਗਈ ਸਭ ਰੋਗ ਗਵਾਇਆ ਸਾਰਾ ਹੀ ਰੋਗ ਜੋ ਲਿਆ ਗਿਆ ਸਾਰੇ ਰੋਗ ਚਲੇ ਗਏ ਰੋਗ ਬਹੁ ਬਚਨ ਕੋਈ ਰੋਗ ਨਹੀਂ ਹੈ ਜੀ ਤੇ ਰੋਗ ਹੋ ਗਿਆ ਸਭ ਵੀ ਸਾਰੀ ਨਾਲ ਇਹ ਵੀ ਬਹੁ ਬਚਨ ਦੱਸ ਰਿਹਾ ਵੀ ਰੋਗ ਬਹੁ ਬਚਨ ਪਹਿਲਾਂ ਨਾਏ ਆਇਆ ਸੀ ਇੱਥੇ ਨੌ ਆਇਆ ਭਾਵ ਨੌ ਹੈ ਜੀ ਕੋਈ ਗੱਲ ਠੀਕ ਹੈ ਜੀ ਕਿਉਂਕਿ ਉਹ ਜਪਜੀ ਸਾਹਿਬ ਜਦੋਂ ਨਾਏ ਆਉਂਦਾ ਉੱਥੇ ਸਾਹਿਬ ਸਿੰਘ ਜੀ ਨੇ ਨਾਏ ਦੇ ਅਰਥ ਕਾਫੀ ਸਭ ਨੂੰ ਬੜਾ ਭਲੇਖਾ ਵੀ ਕੀ ਅਰਥ ਹੋਣਗੇ ਨਾਏ ਦੇ ਨਾਇ ਮੰਨੀਏ ਨਾਮ ਉਪਜੈ ਸਹਜੇ ਸੁਖ ਪਾਇਆ ਨਾਇ ਮੰਨੀਏ ਸ਼ਾਂਤ ਉਪਜੈ ਨਾ ਨਾਮ ਉਪਜੈ ਜਿਹੜਾ ਉਪਜ ਆ ਗਿਆ ਉਹਦੇ ਅੰਦਰੋਂ ਨਾਮ ਨਾਮ ਇੱਕ ਇੱਥੇ ਜਿਹੜਾ ਅੰਦਰੋਂ ਪੈਦਾ ਹੁੰਦਾ ਗਿਆਨ ਇੱਕ ਹੋਏ ਤਾਂ ਉਪਜੈ ਉਹ ਉਪਜਣੇ ਇਹਨੇ ਆਪੇ ਪੈਣ ਰੂਪ ਹੋ ਜਾਣੇ ਉਪਜੈ ਸਹਜੇ ਸੁਖ ਪਾਇਆ ਮਾਂ ਦੇਖ ਜਾਂਦਾ ਮੁਰ ਤੇਖ ਜਾਂਦਾ ਉਸੋ ਕੋ ਦਾ ਜਲਾ ਮੰਨਦੇ ਟਿਕੜ ਨਾਲ ਮਿਲਦਾ ਥਨ ਆਉ ਉਹਨੂੰ ਮੰਨ ਕਈ ਜਿਹੜਾ ਹੈ ਨਾਮ ਉਹ ਅੰਦਰੋਂ ਜਨ ਪਦਾਰਥ ਮਿਲਦਾ ਸੁਖ ਪਾਇਆ ਸਹਿ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ ਸਦਾ ਸੁਖ ਸਹਿ ਸੁਖ ਇਹ ਸੁਖ ਕੋ ਜਾਂ ਸਦਾ ਜਿਹੜੇ ਸੁਖ ਤੇ ਬਾਅਦ ਦੁੱਖ ਦੀ ਪੈਦਾ ਹੁੰਦਾ ਉਹਨੂੰ ਸਹਿ ਸੁਖ ਕਹਿੰਦੇ ਨੇ ਸੁਖ ਸਾਗਰ ਦੀ ਗੱਲ ਹੋ ਰਹੀ ਹੈ ਜੀ ਇਹ ਫਿਰ ਹੈ ਸਾਗਰ ਤੱਕ ਪਹੁੰਚਿਆ ਬਿਲਕੁਲ ਠੀਕ ਹੈ ਸੁਖ ਸਾਗਰ ਦੀ ਗੱਲ ਠੀਕ ਹੈ ਜੀ ਨੈ ਮੰਨੀਏ ਸ਼ਾਂਤ ਉਪਜੈ ਹਰ ਮਨ ਵਸਾਇਆ। ਸ਼ਾਂਤੀ ਪੈਦਾ ਹੋ ਜਾਂਦੀ ਐ। ਬਾੜਾ ਮਨ ਦੇ ਵਿੱਚ ਹਰ ਵਸਿਆ ਤੇ ਟਿਕ ਜਾਂਦਾ। ਮਨ ਨੂੰ ਹਰ ਵਕਤ ਸਾਖਸ਼ਾਤ ਹਰ ਗੁਰ ਅਰਜਨ ਪ੍ਰਤਖ ਹਰ ਹਰ ਪ੍ਰਤਖ ਹੈ। ਉਹਦੇ ਮਨ ਵਿੱਚ ਹਰ ਪ੍ਰਤਖ ਹਰ ਉਹਨੂੰ ਦਿਖ ਰਿਹਾ ਆਪਣੀ ਅੰਦਰੋਂ ਹੀ। ਅੰਦਰ ਦਾ ਪਹਿਲਾਂ ਵੀ ਜਿਹੜਾ ਝਾਕਦਾ ਬਾਹਰ ਨੂੰ ਸੀ ਖੋਜਦਾ ਬਾਹਰੋਂ ਸੀ ਹਰੂੰ। ਹਰ ਤਾਂ ਸਿਰੇ ਸੀ ਪਰ ਲਵਦਾ ਬਾਹਰ ਸੀ ਠੀਕ ਮਨੀ ਵਸਾਇਆ ਮਨ ਹਰ ਵਸ ਕੇ ਹਾਂ ਜੀ ਬੰਤ ਤਾਂ ਪਹਿਲਾਂ ਹੀ ਵਸਦਾ ਸੀ ਜਾਨੀ ਸੱਜਣ ਲੱਗਾ ਰਾਮ ਰਾਜ ਠੀਕ ਲੱਭੇ ਪਿਆ ਵਸ ਪਹਿਲਾਂ ਵੀ ਪਰ ਇਹ ਨਵਦਾ ਬਾਹਰ ਸੀ ਨਾਨਕ ਨਾਮ ਰਤਨ ਹੈ ਗੁਰਮੁਖੀ ਹਰ ਤੇ ਆਇਆ ਨਾ ਨਿਕਨ ਨਾ 2021 ਕੋਈ ਹੋਰ ਕੁਛ ਨਹੀਂ। ਨਾਮ ਦਾ ਰੰਗ ਚੜਦਾ ਹਿਰਦੇ 'ਚ, ਇਹਦਾ ਹੀ ਰੰਗ ਮੰਨ ਤੂੰ ਇਹਦਾ ਹੀ ਰੰਗ ਚੜਨੇ ਲੋ ਮਰਦਾ ਜਿਹੜਾ ਰੰਗਿਆ ਜਾਂਦਾ ਹੈ। ਦਾ ਧਿਆਨ ਫਿਰ ਹਰ ਦੇ ਵਿੱਚ ਹੀ ਰਹਿੰਦਾ। ਘਰ ਦਾ ਰੰਗ ਝਲ ਜਾਂਦਾ। ਠੀਕ ਹੈ ਜੀ। ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ। ਹਾਂਜੀ <coughs>